ਸ਼ੇ ਲੋਕ ਦਇਆ ਕਰਨੰ ਦੁਖ ਹਰਨੰ ਉਚਰਣੰ ਨਾਮ ਕੀਰਤਨੈ ਦਇਆਲ ਪੁਰਖ ਭਗਵਾਨੈ ਨਾਨਕ ਲਿਪਤ ਨਾ ਮਾਇਆ ਦਇਆ ਕਰਨੰ ਉਹ ਦਇਆ ਕਰਨ ਵਾਲਾ ਹੈ ਔਰ ਵਾਲਾ ਹੈ ਕੀ ਕਰਦਾ ਦੁੱਖ ਰੇ ਜਾਂਦਾ ਦੁੱਖ ਦੂਰ ਹੋ ਜਾਂਦਾ ਹੈ ਉਚਰਣੰ ਨਾਮ ਕੀਰਤਨੈ ਜਦੋਂ ਕੋਈ ਯਾਗਨ ਕਰਦਾ ਨਾ ਗਿਆਨ ਗੁਰਬਾਣੀ ਦਾ ਕੀਰਤਨ ਗੁਰਬਾਣੀ ਹੋਈ ਹੈ ਜਦੋਂ ਗੁਰਬਾਣੀ ਦਾ ਕੋਈ ਗਿਆਨ ਉਚਾਰਨ ਕਰਦਾ ਨਾ ਸਮਝ ਕੇ ਉਹ ਗਿਆਨ ਕਰਦਾ ਫਿਰ ਦੱਸ ਲੈ ਕਿਸੇ ਨੂੰ ਗਿਆਨ ਕਰਾਉਂਦਾ ਹੈ ਕਹਿੰਦੇ ਫਿਰ ਉਹਦੇ ਤੇ ਦਇਆ ਐਸੀ ਹੁੰਦੀ ਹੈ ਉਹਦੇ ਸਾਰੇ ਦੁੱਖ ਦੂਰ ਹੋ ਜਾਂਦੇ ਆਪਣੇ ਵੀ ਕਰਦਾ ਤੇ ਦੂਜਿਆਂ ਦੇ ਵੀ ਹੋ ਜਾਂਦੇ ਨੇ ਸੋਣ ਵਾਲਿਆਂ ਦੇ ਵੀ ਹੋ ਜਾਂਦੇ ਨੇ ਦੁੱਖ ਦੂਰ ਕਿਵੇਂ ਹੁੰਦੇ ਨੇ ਇਹ ਦੱਸਿਆ ਨਾਲੇ ਕੀਰਤਨ ਦੀ ਲਿਖੇ ਨੇ ਵਿੱਚ ਕੀਰਤਨ ਕੀ ਹੁੰਦਾ ਚਰਣਾਂ ਨਾਮ ਕੀਰਤਨ ਹੈ ਜੇ ਕੋਈ ਨਾਮ ਦੀ ਵਿਆਖਿਆ ਸੁਣਾਵੇ ਹਾਂ ਜੀ ਹਾਂ ਜੀ ਹਾਂ ਜੀ ਵਿਆਲ ਪੁਰਖ ਭਗਵਾਨ ਹੈ ਨਾਨਕ ਨਿੱਕ ਨਾਮ ਆਇਆ ਵਿਆਲ ਪੁਰਖ ਭਗਵਾਨ ਹੈ ਉਹ ਕਦੇ ਵੀ ਮਾਇਆ ਚ ਲੱਪਟ ਮਾਇਆ ਜੀਵ ਹੁੰਦਾ ਇਹਦਾ ਜਿਹੜਾ ਮੂਲ ਹੈ ਕਦੇ ਮਾਇਆ ਚ ਲੱਪਟ ਹੁੰਦਾ ਠੀਕ ਹੈ ਜੀ ਇਹ ਮੂਲ ਦੀ ਉਹ ਗੱਲ ਦੱਸੀ ਜਾ ਰਹੀ ਭਗਵਾਨ ਨੇ ਮੂਲ ਨੂੰ ਕਿਹਾ ਬਿਲਕੁਲ ਜੀ ਬਿਲਕੁਲ ਔਰ ਕਬਗਵਾਨ ਹਾਂਜੀ ਭਾਈ ਬਲੰਦੜੀ ਬੁਝ ਗਈ ਰਖੰਦੜੋ ਪ੍ਰਭ ਆਪ ਜਿਨੂੰ ਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ ਜਿਹੜੀ ਅਗ ਜਲਦੀ ਸੀ ਪਾਹੇ ਬਲੰਦੜੀ ਸੀ ਅੰਦਰ ਅੱਗੇ ਜਲਦੀ ਸੀ ਤ੍ਰਿਸ਼ਨਾ ਦੀ ਉਹ ਬੁਝ ਗਈ ਰਖੰਦੜੋ ਬਰਾਓ ਆਪ ਜਦ ਪ੍ਰਭ ਆਪ ਰਾਖਾ ਬਣਿਆ ਉਹਨੇ ਆ ਬਾਹ ਬੜੀ ਤੱਕ ਬੁਝ ਗਈ ਸਾਰੀ ਇਹਨੋ ਭਾਈ ਮੇਦਨੀ ਨਾਨਕ ਸੋਪ੍ਰਬ ਜਾਪ ਜਿਹਨੇ ਕਹਿੰਦੇ ਆ ਧਰਤੀ ਪੈਦਾ ਕੀਤੀ ਐ ਜਿਹਨੇ ਸ਼ਰੀਰ ਦਿੱਤਾ ਪੈਦਾ ਕੀਤਾ ਜੇ ਉਹ ਨੂੰ ਸਮਝੋ ਉਹਨੂੰ ਜਾਣੋ ਨਾਨਕ ਸੋਪ੍ਰਬ ਜਾਪ ਉਹੀ ਤਰ੍ਹਾਂ ਬਣਾ ਰੂਪਰਾ ਬਣ ਕੇ ਚੱਲੋ ਠੀਕ ਹੈ ਜੀ ਭਾਵੇਂ ਬਲੰਦੜੀ ਬੁੱਝ ਗਈ ਰਖੰਦੜੋ ਪ੍ਰਭ ਆਪ ਜਿਨੂੰ ਪਾਈ ਮੇਦਨੀ ਮੇਦਨੀ ਤੋਂ ਕੀ ਭਾਵੇਂ ਜੀ ਆ ਜਿਹੜਾ ਸ਼ਰੀਰ ਐ ਨਾ ਇਹ ਮੇਦਨੀ ਹੀ ਐ ਇਹਦੇ ਕਰਕੇ ਹੀ ਹਿਰਦਾ ਉੱਥੇ ਨਾਮ ਜਪਣਾ ਪੈਦਾ ਹੁੰਦਾ ਅਜਾ ਧਰਤੀ ਸਮਝੋ ਇਹ ਧਰਤੀ ਹੈ ਸਰੀਰ ਇਹਦੇ ਵਿੱਚ ਹਿਰਦੇ 'ਚ ਨਾਮ ਪੈਦਾ ਹੋਣਾ ਹੈ ਜੀ ਹਾਂਜੀ ਹਾਂਜੀ ਤੇ ਹੁਣ ਨਾਲ ਪ੍ਰਭ ਨੂੰ ਜਾਣੋ ਇਹ ਕਹਿਣਾ ਚਾਹੁੰਦੇ ਆ ਜੀ ਆਨੰਕ ਸੋਤ ਪ੍ਰਭੂ ਇੱਕ ਠੀਕ ਜੀ ਜੀ ਪੌੜੀ ਜਾ ਪ੍ਰਭ ਭਏ ਦਿਆਲ ਨਾ ਬਿਆਪੈ ਮਾਇਆ ਕੋਟ ਅਗਾ ਗਏ ਨਾਸ ਹਰ ਇੱਕ ਤੇ ਆਇਆ ਜਦੋਂ ਦਿਆਲ ਹੋਏ ਪ੍ਰਭੂ ਜੀ ਜਦੋਂ ਦਿਆਲ ਹੋਏ ਨਾ ਵਿਆਪੇ ਮਾਇਆ ਫਿਰ ਮਾਇਆ ਦੀ ਵਿਆਪ ਮਾਇਆ ਅੰਦਰ ਮਾਇਆ ਦਾ ਭਗਮ ਕਰਨੀ ਹੁੰਦਾ ਮਾਇਆ ਦਾ ਮੋਹ ਨੂੰ ਕਰਦਾ ਮਾਇਆ ਦਾ ਪ੍ਰਭਾਵ ਵੱਡਾ ਨਹੀਂ ਫਿਰ ਘਟਦਾ ਜਾਂਦਾ ਕੋਟ ਅਗਾ ਹੋਏ ਨਾਸ ਕਰੋਨਾ ਪਾਪਾਂ ਦਾ ਨਾਸ ਹੋ ਜਾਂਦਾ ਕਰੋਣਾ ਕਾਰਨ ਜਿਹੜੇ ਨਹੀਂ ਜਿੰਨਾ ਕਰਕੇ ਅਸੀਂ ਹੁਕਮ ਦਾ ਵਿਰੋਧ ਕਰਦੇ ਆ ਉਹ ਸਾਰੇ ਅਗਲੇ ਉਹਨਾਂ ਦਾ ਨਾਸ ਹੋ ਜਾਂਦਾ ਹੈ ਉਹ ਹੁਕਮ ਦੇ ਬਾਕੀ ਗੱਲਾਂ ਜੀ ਧਿਆਨ ਨਹੀਂ ਲੋੜਾਂ ਉਹ ਅਗਲੇ ਪਾਪ ਨਾਲ ਹੋ ਜਾਂਦਾ ਠੀਕ ਹੈ ਜੀ ਇੱਕ ਦਾ ਕੀ ਬਣਦਾ ਜੀ ਹਰ ਇੱਕ ਤੇ ਆਇਆ ਜੇ ਕੋਹ ਗੇ ਹਰ ਦੇ ਵਿੱਚ ਧਿਆਨ ਰੱਖਿਆ ਅੱਛਾ ਜੀ ਇਕ ਹੋ ਗਿਆ ਹੋ ਕੇ ਧਿਆਨ ਲੱਗਿਆ ਹਰ ਠੀਕ ਹੈ ਜੀ ਨਿਰਮਲ ਭਏ ਸਰੀਰ ਜੰਤੂੜੀ ਨਾ ਆਇਆ ਮਨ ਤਨ ਭਏ ਸੰਤੋਖ ਪੂਰਨ ਪ੍ਰਭ ਸਰੀਰ ਜੰਤੂੜੀ ਨਾ ਆਇਆ ਸਰੀਰ ਹੋ ਗਿਆ ਇਹਦਾ ਨਿਰਮਲ ਹੋ ਗਿਆ ਜੰਤੂੜੀ ਦੇ ਨਾ ਆਇਆ ਗੁਰਬਾਣੀ ਦੇ ਗਿਆਨ ਦੇ ਵਿੱਚ ਇਸ਼ਨਾਨ ਕੀਤਾ ਨਾਮ ਦਾ ਜਾਂ ਨਾਮ ਦੇ ਵਿੱਚ ਗੁਰਬਾਣੀ ਦੇ ਗਿਆਨ ਚ ਮਨੂ ਸਾਫ ਕੀਤਾ ਨਾਲ निर्बल <Nirmal> हो गया मन탄 पाए संतोष पूर्ण प्रभु पाया माना और हृदय के संतोष ज्यादा हो गया तो दुखी हो गया मन बस यही पूर्ण प्रभु पाए ये पूर्ण प्रभु की प्राप्ति ਜਿੰਨੇ ਕੁ ਟਾਂਬਦੇ ਲੋਕ ਸੀ ਗੁਰਸਿੱਖ ਸੀ ਜਿਹੜੇ ਸਾਰੇ ਇੱਕ ਪਿਤਾ ਇੱਕ ਸ੍ਰੀਮ ਬਾਰਕ ਮੁੰਨੜ ਵਾਲੇ ਨੇ ਇੱਕੋ ਕੁਟੰਬਾ ਜਿੰਨੇ ਵੀ ਲੋਕ ਨੇ ਦੁਨਿਆਵੀ ਦ੍ਰਿਸ਼ਟੀਕੋਣ ਤੋਂ ਚਾਹੇ ਇਸਾਈ ਹੋਣ ਚਾਹੇ ਉਹ ਪੰਡਤ ਹੋਣ ਚਾਹੇ ਕੁਝ ਵੀ ਹੋਣ ਪਰ ਜਿਹੜੇ ਬਣਦੇ ਨੇ ਇੱਕ ਪਿਤਾ ਇੱਕ ਸ੍ਰੀਮ ਬਾਰਕ ਉਹ ਗੁਰਮਤ ਨੂੰ ਮੰਨਦੇ ਨੇ ਸਾਰੇ ਉਹਨਾਂ ਦਾ ਇੱਕੋ ਖਾਨਦਾਨ ਹੈ ਕੋਈ ਘਟਾ ਹੁੰਦਾ ਹੈ ਉਹ ਸਾਰੇ ਕਰ ਜਾਂਦੇ ਨੇ ਉਹੀ ਕਰਦੇ ਨੇ ਕੁਰਬਾਨੀ ਨੂੰ ਦੂਜੇ ਨੂੰ ਕਰਦੇ ਜਿਹੜੇ ਕੁਰਬਾਨੀ ਨੂੰ ਮੰਨਦੇ ਨੇ ਉਹੀ ਕਰਦੇ ਨੇ ਬਾਕੀ ਨਹੀਂ ਕਰ ਸਕਦੇ ਉਹ ਇੱਕੋ ਖਸਮ ਦੇ ਲੋਕ ਨੇ ਠੀਕ ਹੈ ਜੀ ਜਦੋਂ ਆਪਾਂ ਪੜੇ ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ ਇੱਥੋਂ ਵੀ ਇੱਕ ਗੱਲ ਸਪਸ਼ਟ ਹੁੰਦੀ ਹੈ ਕਿ ਸੰਤੋਖ ਜਿਹੜਾ ਹੈਗਾ ਇਹ ਹੀ ਪੂਰਨ ਪਰਪਾਇਕ ਹੈ ਜੀ ਸੰਤੋਖ ਪਿਤਾ ਮੰਨਿਆ ਮਾਤਾ ਮੰਨੀ ਹੈ ਹੋਰ ਮਤਨ ਉਹ ਮੰਨਣ ਵਾਲੇ ਸੰਤੋਖ ਨੂੰ ਪਿਤਾ ਵਾਲੇ ਸੰਤੋਖ ਪਿਟਾ ਹੈ ਨਾ ਸੰਤੋਖ ਪਿਟਾ ਹੈ ਠੀਕ ਹੈ ਜੀ ਸੰਤੋਖੀ ਨੇ ਉਹ ਕੋਈ ਖਾਂਦਾ ਨਾ ਠੀਕ ਹੈ ਪਰ ਜਦੋਂ ਮਨავਣੀ ਚ ਵੀ ਜਿਹੜਾ ਲਿਖਿਆ ਪਿਆ ਹੋਇਆ ਤਿੰਨ ਦਾ ਉਹਨਾਂ ਨੂੰ ਪਰ ਸੰਤੋਖ ਇੱਕੇ ਵਸਤੂ ਹੈ ਸਾਰੀ ਗੱਲ ਸੰਤੋਖ ਦੀ ਹੋਈ ਹੈ ਹੋਰ ਹੋਰ ਕੀ ਉਹ ਉਹਦਾ ਸ਼ਬਦ ਵਿਚਾਰ ਹੈ ਬਾਕੀ ਤਾਂ ਵਿਚਾਰ ਜੇ ਹੁੰਦਾ ਉਹ ਕਦੋਂ ਹਾਂਜੀ ਇਹੀ ਹੈ ਉਹ ਇਹ ਵਸਤ ਤਜੀਣਾ ਜਾਏ ਸੰਤੋਖੇ ਨਾਮ ਬਣ ਜਾਂਦਾ ਹੈ ਜੀ ਬਿਲਕੁਲ ਜੀ ਬਿਲਕੁਲ ਨਾਮ ਦੇ ਬਿਨਾ ਸੰਤੋਖ ਹੈ ਕਿੱਥੇ ਗਿਆਨ ਦੇ ਸੰਤੋਖ ਕਿੱਥੋਂ ਹੈ ਠੀਕ ਹੈ ਜੀ ਇੱਥੇ 18ਵੀਂ ਪੌੜੀ ਦੀ ਸਮਾਪਤੀ ਹੈ ਜੀ